ਫੱਫਾ ਬਿਨ ਫੁੱਲਾਂ ਫਲ ਹੋਈ ਤਾਂ ਫਲ ਫੰਕ ਲਖੈ ਜੋ ਕੋਈ ਫੱਫਾ ਬਿਨ ਫੁੱਲੇ ਫਲ ਹੋਈ ਕਹਿੰਦੇ ਜਿਹੜਾ ਨਾਮ ਦਾ ਫਲ ਲਗਦਾ ਇਹਨੂੰ ਕਹਿੰਦਾ ਫੁੱਲ ਨੀ ਆਉਂਦਾ ਫੁੱਲ ਦਾ ਸ਼ਰਦ ਹੈ ਤੇ ਬੰਦੇ ਸ਼ਰਦਾਂ ਟੁੱਟ ਜਾਂਦੀ ਆ ਫੁੱਲ ਛੱਡ ਜਾਂਦਾ ਤਾਂ ਫਲ ਆਉਂਦਾ ਫੁੱਲ ਨਹੀਂ ਐ ਤਾਂ ਫਲ ਬਿਨ ਫੁੱਲੇ ਫਲ ਹੋਈ ਉਹ ਪੇੜ ਜਿਨ੍ਹਾਂ ਨੂੰ ਫੁੱਲ ਲੱਗਦੇ ਨੇ ਨਾ ਉਹ ਫੁੱਲ ਝੜ ਜਾਂਦਾ ਉੱਥੇ ਫਲ ਲੱਗ ਜਾਂਦਾ ਦੂਆ ਫੁੱਲ ਹੁੰਦਾ ਹੈ ਉਹ ਬੇਲ ਨੂੰ ਕਹਿੰਦੇ ਅਸੀਂ ਬੇਲ ਐਨੂੰ ਫੁੱਲ ਨਹੀਂ ਰਹਿੰਦਾ ਤਾਂ ਫਲ ਲੱਗਦਾ ਐਸਾ ਬੂਟਾ ਫੁੱਲ ਝੜ ਜਾਂਦੇ ਨੇ ਸਾਰੇ ਆਉਂਦਾ ਪਹਿਲਾਂ ਇਹਨੂੰ ਫੁੱਲ ਹੁੰਦਾ ਹੀ ਦੀ ਫੁੱਲ ਤਾਂ ਛੜਦਾ ਹੈ ਛੜਦਾ ਛੱਡਦੀ ਦੀ ਹੈ ਛੜਦਾ ਅੰਦੀ ਹੁੰਦੀ ਹੈ ਫਿਰ ਫੁੱਲ ਲੈ ਫਲ ਹੋਈ ਤਾਂ ਫਲ ਪੰਕ ਲਖਾਇ ਜੇ ਕੋਈ ਆਇਆ ਲਖਾਇ ਲਾਹੂਦ ਚਖਾਇ ਨਹੀਂ ਆਇਆ ਅੱਲਾਹ ਜੇ ਤਾਂ ਹੁੰਦਾ ਚਖਾਇ ਫੇਟਾ ਸੁਖਾਰੀ ਫੜਉਂਦਾ ਲਖਾਇ ਜੇ ਉਸ ਫੁੱਲ ਦਾ ਫਲ ਦਾ ਦਰਸ਼ਨ ਰੋਜਵੇ ਕਿਸੇ ਨੂੰ ਥੋੜਾ ਜਿਹਾ ਵੀ ਹਿੱਸੇ ਦਾ ਹੰਕੋ ਇੱਕ ਗੁਣ ਦੀ ਵੀ ਸਮਝ ਆ ਜਾਵੇ ਜੇ ਇਹ ਫਲ ਕੀ ਹੈ ਗੁਣਾਂ ਦਾ ਸਮੂਹ ਹੈ ਗੁਣ ਸਮੂਹ ਸਾਰੇ ਗੁਣਾਂ ਦਾ ਸਮੂਹ ਦਾ ਨਵਾਂ ਨਾਮ ਹੈ ਇੱਕ ਫੁਰਕਾ ਵੀ ਪਤਾ ਲੱਜੇ ਇੱਕ ਦੀ ਵੀ ਸਮਝ ਆ ਜਾਵੇ ਜਿਵੇਂ ਓੰਕਾਰ ਦੀ ਸਮਝ ਆ ਜਾਵੇ ਨੇ ਫੁਰਕਾ ਇੱਕ ਕੀ ਹੈ ਇੱਕ ਦੀਆਂ ফাঁਕਾਂ ਨੇ ਓੰਕਾਰ ਇੱਕ ফাঁਕ ਹੈ ਸਤਨਾਮ ਦੂਈ ফাঁਕ ਹੈ ਕਰਤਾ ਪੁਰਖ ਨਿਰਪਰਵਰ ਨਿਰਭੈ ਅਕਾਲ ਮੂਰਤ ਜੁਡੀ ਸਾਇਤਮੇ ਅੱਠ ফাঁਕਾਂ ਨੇ ਅੱਠ ਪਾਰਡ ਨੇ ਇੱਕ ਪਾੜ ਵੀ ਤੁਹਾਨੂੰ ਜੇ ਪੂਰਾ ਗਿਆਨ ਸਮਝ ਆ ਜਾਵੇ ਤਾਂ ਸੱਤਾਂ ਦਾ ਗਿਆਨ ਇੱਕਦੇ ਵਿੱਚ ਹੀ ਸਮਾਇਆ ਹੋਇਆ। ਤਾਂ ਫਲ ਫੰਕ ਲਖਾਇ ਦੇ ਕੋ ਲਗੜਾਉਣੋਂ ਜਲਦੀ ਬੁੱਧੀ ਰਹਿਣ ਸਮਝ ਆ ਜਾਵੇ ਬੁੱਧੀ ਦੀ ਬੁੱਧੀ ਇੱਕ ਦਾ ਵੀ ਗਿਆਨ ਪੈ ਜਵੇ ਜੇ ਅੱਖਾਂ ਦਾ ਗਿਆਨ ਹੈ ਗੁਰਬਾਣੀ ਚ ਵੀ ਆਖਿਆ ਆਠਾਂ ਦੂਣ ਨਾ ਪਰਈ ਫੰਕ ਤਾਂ ਫਲ ਫੰਕ ਸਭੈ ਸਤਨਾਫਾਰੇ ਦੋਨਾਂ ਨੇ ਪੜੀ ਫੇਰ ਮਾਨਾਰਜਿਤ ਦੋ ਦੀ ਹੁੰਦੇ ਫੇਰ ਦਾੜ ਨਹੀਂ ਹੁੰਦੀ ਕਦੇ ਕੇ ਵਿਚਾਰਿਆ ਜਾਂਦਾ ਜਿੱਦਾਂ ਤੁਹਾਨੂੰ ਸਤਨਾਮ ਬਧਾਈ ਸਮਝ ਆ ਗਈ ਵਿਚਾਰ ਕੇ ਦੁਬਾਰਾ ਮਾਨ ਅੰਛਤ ਭੰਗ ਹੁੰਦਾ ਮਨ ਭੰਗ ਹੁੰਦਾ ਪੜੀ ਪ੍ਰੰਤ ਵਿਚਾਰਾ ਜੇ ਸਤਨਾਮ ਬਚਾਲ ਲਿਆ ਜਾਂ ਕਰਤਾਪੁਰਖ ਬਚਾਲ ਲਿਆ ਮਿਰ ਭਉ ਵਿਚਾਰ ਲਿਆ ਇੱਕ ਚੀਜ਼ ਵਿਚਾਰ ਲਓ ਤੁਸੀਂ ਡੀਪਲੀ ਦੁਬਾਰਾ ਜੇ ਸਰਬੰਨ ਇਕੱਠੇ ਹੀ ਦੋ ਹੁੰਦੇ ਜੇ ਦੋ ਨਹੀਂ ਹੁੰਦੇ ਤਾਂ ਦੁਗਾ ਜਨਮ ਨਹੀਂ ਮਿਲਦਾ ਉਸ ਫਾਂਕ ਨੇ ਸਾਰੇ ਅਗਲੇ ਜਿੰਨੇ ਸਰੀਰ ਧਾਰਨ ਕਰਦੇ ਸਾਰੇ ਹੀ ਪਾੜ ਦਿੱਤੇ ਸਾਰੇ ਕੱਪੜੇ ਪਾੜ ਦਿੱਤੇ ਫਾਰੇ ਕੱਪੜੇ ਜਿੰਨੇ ਹੋਰ ਪਹਿਨਣੇ ਸੀ ਸਰੀਰ ਧਾਰਨ ਕਰਨੇ ਸੀ ਸਾਰੇ ਪਾੜ ਕੇ ਫਿਰਦ ਤੇ ਪਰੇ ਅਗਲਾ ਜਨੂ ਖਤਮ ਇਹ ਕਹਿ ਰਹੇ ਨੇ ਤੁਸੀਂ ਦੇਖੋ ਕਿੰਨੀ ਡੱਲ ਕਿੰਨਾ ਕੁਝ ਭਰਿਆ ਪਿਆ ਵਿਚਾਰੇ ਤੇ ਪਤਾ ਲੱਗਦਾ ਨਾ ਖੰਡਪਾੜ੍ਹ ਚ ਕੋਈ ਸਕੰਡਾਂ ਚ ਪੜ ਕੇ ਗਾਹਾਂ ਚਲੇ ਜਾਂਦਾ ਪੜਨ ਵਾਲਾ ਜੀ ਬਿਲਕੁਲ ਹਾਂਜੀ ਇਹ ਸੀਗਾ ਜੀ ਭਗਤ ਕਬੀਰ ਜੀ ਦਾ ਉਪਦੇਸ਼ ਤਾਂ ਫਲ ਫੰਕ ਸਬੈ ਤਾਂ ਨਹੀਂ ਹੈ ਅੱਛਾ ਨਹੀਂ ਲਾਗੇ ਨੇ ਤਾਂ ਤਿਸ ਤਿਸ ਫਲ ਫੰਕ ਦੇ ਵਿਚਾਰ ਦੇ ਸਬੈ ਤਨ ਫਾੜੇ ਫਾੜੇ ਦਾ ਕੀ ਭਾਵੇਂ ਜੀ ਫਾੜ ਦਿੱਤੇ ਕੱਪੜੇ ਸੀ ਤੁੰ ਨੂੰ ਸ਼ਰੀਰ ਅਗਲੇ ਕੱਪੜੇ ਤੇ ਨੂੰ ਅੱਛਾ ਤੇ ਜੇ ਅਗਲਾ ਜਨਮ ਆਦਣਾ ਉਹਦਣ ਉਹ ਆ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਉੱਥੇ ਫੁੱਲ ਦੀ ਗੱਲ ਤਾਂ ਹੁੰਦੀ ਹੈ ਵੈਸੇ ਹੈ ਗਿਆਨ ਇਹ ਵੀ ਕਿਆ ਹੋਇਆ ਹੈ ਫਲ ਕਾਰਨ ਫੁੱਲੀ ਬਣਦਾ ਹੈ ਪਹਿਨਾ ਅਸੀਂ ਕਰਮ ਕਾਂਡੇ ਕਰਦੇ ਆਉਨੇ ਆਂ मत ਦੇ ਵਿੱਚ ਕਬੀਰ ਵੀ ਕਰਦਾ ਆਇਆ ਹੈ ਫੁੱਲ ਲੱਗਿਆ ਸੀ ਸ਼ਰਦਾ ਹੋਈ ਸੀ ਮਨ ਦੇ ਵਿੱਚ ਇੱਛਾ ਹੋਈ ਸੀ ਫਲ ਲੱਗਾ ਤੱਬ ਫੁੱਲ ਬੁલાਏ ਫਲ ਤਾਂ ਮਿਲੂਗਾ ਜੇ ਫੁੱਲ ਝੜ ਜਾਊਗਾ ਪਹਿਲਾਂ ਫੁੱਲ ਝੜੇ ਤੋਂ ਹੀ ਫਲ ਬਣਦਾ ਹੈ ਲੱਗਦਾ ਹੈ ਜੇ ਫੁੱਲ ਝੜ ਜਾਂਦਾ ਫਲ ਨਹੀਂ ਵੀ ਬਣਦਾ ਕੋਈ ਜ਼ਰੂਰੀ ਨਹੀਂ ਹੈ ਪਰ ਜਿੱਤੇ ਫਲ ਬਣਨਾ ਹੈ ਉੱਤੇ ਫੁੱਲ ਝੜਨਾ ਜੇ ਸਮਝ ਆ ਜਾਣੀ ਹੈ ਕਿ ਸਰਦਾ ਬਾਣ ਨਹੀਂ ਰਹਿਣਾ ਸਰਦਾ ਬਾਣ ਜਾਂਦੇ ਨੇ ਮੰਦਰਾਂ 'ਚ ਸਰਦਾ ਬਾਣ ਜਾਂਦੇ ਨੇ ਗੁਰਦੁਆਰਿਆਂ 'ਚ ਕੀ ਕਰਜਣਾ ਉਥੇ ਜੇ ਜਾਂਦੇ ਨੇ ਤਾਂ ਕੁਝ ਦੱਸ ਦੇਣੇ ਉਹਨਾਂ ਦਾ ਪਹਿਲੇ ਕੱਲ ਦਾ ਵਿਰੋਧ ਕਰਕੇ ਆਉਂਦੇ ਨੇ ਜੋ ਕੁਝ ਕਰ ਲੈਣੇ ਉਹਦਾ ਵਿਰੋਧ ਕਰ ਦਿੰਦੇ ਨੇ ਜੇ ਗੁਰੂ ਗਏ ਤੇ ਸਤਿਰ ਸਤੇ ਉਹਨਾਂ ਦਾ ਵਿਰੋਧ ਕਰਨੇ ਗਏ ਨੇ ਉੱਥੇ ਉਹ। ਚਰਦਾ ਕਰਕੇ ਨਹੀਂ ਸੀ ਗਏ ਉੱਥੇ। ਜੇ ਕਿਸੇ ਮੰਦਰ 'ਚ ਗਏ ਨੇ ਉਹਦਾ ਵਿਰੋਧੇ ਕਰਕੇ ਆਏ ਨੇ ਉਹਨੂੰ ਦੱਸ ਕੇ ਆਏ ਨੇ ਇਹਦੇ ਨਵੀਂ ਗੱਲ। ਉਹ ਤੇ ਸਾਡੇ ਖੜੀ ਨਹੀਂ ਗਏ ਉੱਥੇ। ਦੁਦਰ ਗਏ। ਠੀਕ ਹੈ ਜੀ। ਕਹਿਣ ਦਾ ਭਾਵ ਪਰਮਾਰਥ ਦੀ ਗੱਲ ਹੈ ਕਿਤੇ ਲੋਕ ਬਾਹਰ ਫੁੱਲਾਂ 'ਚ ਨਾ ਫਸ ਜਾਣ। ਹਾਂ। ਤੋਂ ਵੀ ਤਾੜਨਾ ਕੀਤੀ ਫੁੱਲ ਹੁੰਦੇ ਨੇ ਤਾਂ ਜਾਨ ਨਹੀਂ ਹੁੰਦਾ। ਹਰਿਤਾ ਰਮਨ ਦਾ ਨਾਮ ਫੁੱਲ ਹੈ ਤੇ ਅਸਲੀ ਫੁੱਲ ਤੋਂ ਕਹਾਂ ਫਲ ਆ ਗਿਆਨ ਤਾ ਜਿੱਤੇ ਫੁੱਲ ਹੈ ਉਹ ਤਾਂ ਗਿਆਨ ਨਹੀਂ ਹੈ ਫੁੱਲ ਝੜੇ ਤੋਂ ਗਿਆਨ ਫਲ ਲੱਗਾ ਤਬ ਫੁੱਲ ਬਿਲਾਏ ਜੇ ਫਲ ਕਾਂ ਲੱਗਦਾ ਜੇ ਫੁੱਲ ਝੜ ਜਾਂਦਾ ਜੇ ਸ਼ਰਦਾ ਖਤਮ ਕਰਨਗੇ ਗੁਰਦਵਾਰਾ ਵਾਲੇ ਅਪਦੇਸ਼ ਚ ਤਾਂ ਗਿਆਨ ਆਊਗਾ ਜਦੋਂ ਗਿਆਨ ਆ ਗਿਆ ਗੁਰਮਤ ਦਾ ਸ਼ਰਦਾ ਤੋੜ ਦੂਗਾ ਕੈਸ ਰੈਸ ਕਰ ਦੂਗਾ ਸ਼ਰਦਾ ਨੂੰ ਸ਼ਰਦਾ ਕਰਕੇ ਤਾਂ ਬਰਿਆਦਾ ਹੈ ਬਰਿਆਦਾ ਪੈਦਾ ਕਰਦੀ ਹੈ ਗਿਆਨ ਪਰ ਉਸਾ ਪੈਦਾ ਕਰਦਾ ਹੈ ਜਿਹੜਾ ਗਿਆਨ ਹੈ ਉਹਦੇ ਨਾਲ ਪਰਉਪਰਤਾ ਹੁੰਦਾ ਹੈ ਸ਼ਰਦਾ ਜਿਹੜੀ ਹੈਗੀ ਹੈ ਉਹਦਾ ਉਹਦਾ ਮਾਇਆ ਹੈ ਭਗਤ ਰਵਿਦਾਸ ਜੀ ਦਾ ਸ਼ਬਦ ਕਰੋ ਰਾਗ ਵਿੱਚ ਫਲ ਕਾਰਨ ਫੂਲੀ ਬਨਰਾਏ ਫਲ ਲਾਗਾ ਤਬ ਫੂਲ ਬਿਲਾਏ ਗਿਆਨੈ ਕਾਰਨ ਕਰਮ ਅਭਿਆਸ ਗਿਆਨ ਭਇਆ ਤਾਂ ਕਰਮ ਦੇਖੋ ਨਾ ਗਿਆਨ ਕਾਰਨ ਕਰਮ ਅਭਿਆਸ ਗਿਆਨ ਵਾਸਤੇ ਤਾਂ ਕਰਮ ਅਭਿਆਸ ਕੀਤੇ ਸੀ ਪਰ ਗਿਆਨ ਆ ਗਿਆ ਕਰਮ ਨਾਸ ਕਰਮ ਦਾ ਨਾਸ ਹੈ ਜਿਹੜਾ ਤੜਕੇ ਤੇ ਉਠ਼ ਕੇ ਜੋਗ ਵਿੱਚ ਕਰ ਰਹੇ ਨੇ ਇਹ ਸਭ ਨਾਸ ਕੋਈ ਮਤਲਬ ਨਹੀਂ ਦਾ 2 ਵਜੇ ਉੱਠ ਕੇ ਕਰ। ਸੰਗਤ ਨੂੰ ਸੱਦੋ ਘੰਟਾ ਸੱਦੋ ਘੰਟਾ ਲੈਕਚਰ ਕਰਦੇ ਨੇ ਘੰਟਾ ਤੋਂ ਘੰਟੇ ਛੁੱਟੀ ਜਾਓ ਭਾਈ ਗੱਲ। ਠੀਕ ਹੈ ਜੀ ਹੁਣ ਗੁਰੂ ਨਾਨਕ ਸਾਹਿਬ ਦਾ ਅਪਦੇਸ਼ ਹੈ ਜੀ ਫੱਫੇ ਅੱਖਰ ਤੋਂ। ਹਾਂ ਜੀ। ਫਾਹੀ ਸਭ ਜਗ ਫਾਸਾ ਜਮਕੇ ਸੰਗਲ ਬੰਦ ਲਿਆ ਫੱਫੇ ਫਾਹੀ ਸਭ ਜਗ ਫਾਸਾ ਉਫਾਈਆ ਪਰਮ ਦੀ ਪਰਮ ਜਾਲ ਹੈ ਉਹ ਦਾ ਜਾਲ ਹੈ ਇਹ ਸਾਰੇ ਜੰਗ ਬੰਨਿਆ ਹੋਇਆ ਫਸਿਆ ਹੋਇਆ ਫਫਾ ਫਾਈ ਸਭ ਜੱਕ ਫਾਠਾ ਜਮਦੇ ਚ ਬੰਨਿਆ ਹੋਇਆ ਜਮਦੇ ਬਸ ਹਾਂਜੀ ਗੁਰ ਪ੍ਰਸਾਦੀ ਸੇ ਉਭਰੇ ਜੇ ਹਰ ਸ਼ਰਨ ਆਗਤ ਪਿਆ ਪਰ ਗੁਰ ਗਿਆਨ ਜਿਨਾਂ ਨੂੰ ਹੋ ਗਿਆ ਜਿਨਾਂ ਨੂੰ ਸਮਝ ਆ ਗਈ ਉਹ ਬਹੁਤ ਗਿਆਨ ਦੀ ਕਿਰਪਾ ਨਾਲ ਉੱਪਰ ਨੇ ਬਚ ਗਏ ਨੇ ਉੱਪਰ ਉੱਠ ਖੜੇ ਬਾਹਰ ਨਿਕਲ ਦੁਰਲਭ ਦੇ ਕਲਯੁਗ ਮਹਿ ਪਾਇਆ ਫਿਰਦਾ ਤੂੰ ਕਈ ਜੁਨੀਆਂ ਚ ਆ ਗਿਆ ਇੱਥੇ ਤੱਕ 83 ਲੱਖ ਜਨਮ ਭੋਗਤ ਕੇ ਕਲਯੁਗ ਦੇ ਵਿੱਚ ਆ ਮਾਨੁਖ ਦੇ ਪਾਲੀ ਕਲਯੁਗ ਉਹ ਹੁੰਦਾ ਹੈ ਜਦੋਂ ਆਪੀ ਕਲਪਨਾ ਕਰਦਾ ਹੈ ਜਾਨਵਰਾਂ ਚ ਵੀ ਕਲਪਨਾ ਇੱਛਾ ਇੱਛਾ ਜਿਹੜੀ ਇੱਛਾ ਨਾਲ ਦਾ ਗਰਭ ਚ ਕਰਦਾ ਹੈ ਨਾਲ ਤੇਰੇ ਇੱਥੇ ਜੀ ਇੱਛਾ ਕਰਦਾ ਜੇ ਜੀ ਹੁਣ ਇੱਥੇ ਜੀ ਕੋਈ ਭਾਣੇ ਚ ਹੈ ਜਰੂਰ ਵੀ ਪਾਣੇ ਚਾਹ। ਆ ਜਿਹੜਾ ਹੈ ਹਮੇਸ਼ਾ ਹੀ ਕਲਪਨਾ ਜਿੱਥੇ ਆ ਕਲਜੁਗ। ਜਿੱਥੇ ਕਲਪਨਾ ਨਹੀਂ ਉੱਥੇ ਕਲਜੁਗ ਨਹੀਂ ਹੈ। ਜਿੱਥੇ ਆਪਣੀ ਸੋਚ ਰਹੀ ਹੈ ਜਿਹੇ ਜਿਹੇ ਜਿਹੇ ਤੁੰਗਾ ਇਹਨਾਂ ਨੇ ਦੱਸੇ ਪਾਣੇ। ਪਾਣੇ ਜੁਗ ਹੈ ਅਸੀਂ ਪ੍ਰਚਾਰ ਕੀਤੇ ਨੇ ਵਿਦਵਾਨਾਂ ਨੇ ਸਾਡੇਆਂ ਨੇ। ਕਿ ਨੇ ਜੋ ਜੁਗ ਸਾਨੂੰ ਦੇ ਦਿੱਤੇ ਸੀ ਸਮਝਾ ਦਿੱਤੇ ਸੀ ਜੁਗ ਪੰਡਤ ਨੇ ਸਮਝਾਏ ਹੋ ਜੁਗ ਸੀ ਜਿਹੜੇ ਉਹ ਵੀ ਅਸੀਂ ਆਪਣੇ ਟੀਕਿਆਂ 'ਚ ਉਹਨਾਂ ਦਾ ਪ੍ਰਚਾਰ ਗੁਰਦੁਆਰਿਆਂ ਤੋਂ ਕਰਦੇ ਸੀ। ਉਹ ਜੁਗ ਨਹੀਂ ਹੈ। ਨਾ ਦਸੰਬਰ ਤੋਂ ਬੰਦਾ ਹੈ ਨਾ ਆਦਮਾ ਹੈ ਉਹਨਾਂ ਨੂੰ। ਪਰ ਪ੍ਰਚਾਰ ਉਹਨਾਂ ਦਾ ਹੀ ਕਰਦੇ ਨੇ। ਉਹ ਹੀ ਕਰਦੇ ਸੀ ਨਾ ਪ੍ਰਚਾਰ। ਜਿਹੜੀ ਚੰਗ ਉਹਨੂੰ ਜੁਗਾਂ ਦਾ ਪ੍ਰਚਾਰ ਕਰਦਾ ਰਿਹਾ। ਪਰ ਖਡੂਰ ਸਾਹਿਬ ਤੇ ਵੀ ਉਹਨੂੰ ਜੁਗਾਂ ਦਾ ਪ੍ਰਚਾਰ ਹੋਇਆ। ਤਾਂ ਅਮਰਦਾਸ ਜੀ ਨੇ ਉਹ ਤੋਂ ਕਹੇਆ। ਅਮਰਦਾਸ ਜੀ ਤੋਂ ਬਾਅਦ ਰਬਦਾਸ ਨੂੰ ਤੋਂ ਕਹੇ ਇਹਨੇ ਜੁਗਾਂ ਦਾ ਫਿਰ ਪ੍ਰਚਾਰ ਹੋਇਆ ਉੱਥੇ। ਗੁਰਮਤਿ ਤਾਂ ਉਲਟਾ ਹੀ ਪ੍ਰਚਾਰ ਹੋਦਾ ਰਿਹਾ। ਜਾ ਉਹੀ ਮਨ ਪਾਣੀ ਪਾ ਸਾਡੇ ਵਿੱਚ ਬਾਣੀ ਰਸਾਈ ਜਾਂਦੀ ਰਹੀ ਗੁਪਤੇ ਬੂਝੇ ਜੁਗ ਚਤੂਆਰੇ ਜਿਹੜਾ ਗੁਪਤਾ ਨਾ ਅੰਦਰ ਚ ਆਪਣੇ ਅੰਦਰ ਚਿਤ ਫੰਦਲਾ ਸਤਗੁਰ ਚਿਤ ਗੁਪਤਾ ਜਿਹੜਾ ਉਹਨੇ ਗੁਪਤੇ ਬੂਝੇ ਜੁਗ ਚਤੂਆਰੇ ਕੱਟ ਕੱਟ ਵਰਤੇ ਉਧਰ ਮ ਜਾ ਇਹ ਤਾਂ ਅੰਦਰ ਵਰਤ ਦੇ ਜੁਗ ਬਾਹਰ ਦੇ ਉਹਨੇ ਜੁਗ ਬਾਹਰ ਦਾ ਉਹੀ ਹਵਾ ਉਹੀ ਸੂਰਜ ਉਹੀ ਹਾਂਜੀ ਗੁਪਤੇ ਬੂਜੋ ਜੁਗ ਚਤਵਾਰੇ ਘਟਿ ਘਟਿ ਵਰਤੈ ਉਧਰ ਮਝਾਰੇ ਗੁਪਤੇ ਆਲੇ ਜੁਗ ਚਤਵਾਰੇ ਬੁਝਲ ਹੋਏ ਜਿਹੜੇ ਘਟ ਘਟ ਵਰਤਦੇ ਨੇ ਸਾਰਿਆਂ ਦੇ ਅੰਦਰ ਵਰਤਦੇ ਨੇ ਅੰਦਰ ਵਾਲੀ ਜੀ ਤਾਂ ਬੁਝਣੀ ਹੀ ਪਊਗੀ ਜਿਹੜਾ ਸ਼ਬਦ ਵਿਚਾਰ ਕਰਦਾ ਉੱਥੇ ਕਲਯੁਗ ਨਹੀਂ ਹੈ ਜਿਹੜਾ ਕਲਪਨਾ ਕਰਦਾ تیرਕੁਡੇ ਚ ਕਲਯੁਗ ਹੈ ਹਿਰਦੇ ਚ ਕਲਯੁਗ ਹੈ ਜੀ ਸਿੱਧੀ ਉਹ ਗੱਲ ਹੈ ਹਿਰਦੇ ਚ ਕਲਯੁਗ ਨਹੀਂ ਹੈ ਕਲਯੁਗ ਦੇ ਪਰੇ ਉੱਥੇ ਕਾਲ ਨਹੀਂ ਹੈ ਜਿੱਦੇ ਕਲਪਨਾ ਕਲਪਨਾ ਹੀ ਕਾਲ ਹੈ ਕਬੀਰ ਇਹ ਕਹਿੰਦਾ ਕਾਲ ਕਲਪਨਾ ਕਦੇ ਨਾ ਖਾਏ ਆਪਣੇ ਪਾਣੀ ਜਿਹੜਾ ਚੱਲਦਾ ਉਹ ਉੱਤੇ ਜਿਹੜਾ ਗੁਰ ਪਾਣੀ ਚੱਲਦਾ ਉਹਦੇ ਤੇ ਜਮਲੰਡ ਹੁੰਦਾ ਹੀ ਨਹੀਂ ਹਾਂਜੀ ਅਜੇ ਟੀਕਿਆਂ ਦਾ ਉਹ ਤਾਂ ਜੜ ਅਵਸਥਾ ਦੇ ਯੋਗ ਹੈ ਜੀ ਉਹ ਤਾਂ ਸਮੇਂ ਦੇ ਨਾਲ ਚਲੂ ਆ ਗਿਆ ਜੀ ਮਾਇਆ ਚਾਹ ਜੋ ਕਿੱਥੇ ਮਾਇਆ ਚ ਹੁੰਦੀ ਤਾਂ ਇਹ ਯੋਗ ਨਹੀਂ ਹਾਂ ਪਾਪ ਪੁੰਨ ਦੋਨੋਂ ਭਾਈ ਦੋਹੂ ਮਿਲ ਕੇ ਸੇਛਪਾਈ ਜਿੱਤੇ ਪਾਪ ਹੈ ਉੱਥੇ ਸੰਜੋਗ ਨਹੀਂ ਹੋ ਸਕਦਾ ਪਾਪ ਪੁੰਨ ਜਿੱਤੇ ਧੋਏ ਨਹੀਂ ਉੱਥੇ ਸੰਜੋਗ ਨਹੀਂ ਹੁੰਦਾ ਜਿੱਤੇ ਸੰਜੋਗ ਹੋਵੇ ਪਾਪ ਪੁੰਨ ਹੁੰਦੇ ਹੀ ਨਹੀਂ ਧੋਏ ਦੀ ਪਾਪ ਨੇ ਕੋਡ ਠੀਕ ਸੰਜੋਗ ਪਾਪ ਪੁੰਨ ਨਹੀਂ ਹੈ ਜਾ ਜੋ ਸੱਚਖੰਡ ਵਿੱਚ ਆਉ ਤੇ ਪਾਪ ਨੂੰ ਧੋਈ ਦੀ। ਹਾਂਜੀ। ਫਿਰ ਈਆ ਔਸਰ। ਛੜੈ ਨਾ ਹਾਥਾ। ਨਾਮ ਜਪੋ ਤੋ ਕਟੀਆਂ ਫਾਸਾ। ਆ ਜਿਹੜਾ ਦੁੱਖਾਂ ਜਨਮ ਹੈ ਫਿਰਦੇ ਫਿਰਦੇ ਨੇ ਇੰਦੀਆਂ ਜੁਨਾ ਚੋ ਇਹ ਦੁਬਾਰਾ ਨਹੀਂ ਮਣਣੀ ਤੈਨੂੰ ਇਹ ਔਸਰ ਛੜੈ ਜਨਮ ਬਿਲੋ ਨਹੀਂ ਐ। ਬਹੁਤ ਜਲਦੀ ਇਹ ਕਰਕੇ ਜਨਮ ਫਾਸੀ ਜੇ ਫੱਟਣੀ ਐ। ਇਹ ਜਿਹੜਾ ਪਰਪ ਦਾ ਜਾਲ ਘਟਣਾ ਹੈ ਤਾਂ ਘਟਲਾ ਬੰਨਾ ਪਿਸਟੌਨ ਦਾ ਹੀ ਰਹੇਗਾ ਫਿਰ ਪਸਾਈ ਜਾਈ ਫਿਰ ਪਤਲ ਦੀ ਫੜ ਆਉਂ ਕਦਰ ਨਾਂ ਕਹਾ ਵੈ ਬਾਰੀ ਕਦ ਬਾਰੀ ਆਉ ਫਿਰ ਮੁਖਾਜਨ ਕਦ ਮਿਲੂਗਾ ਕੋਈ ਪਤਾ ਨਹੀਂ ਹੈ ਕਿ ਡਾਈ ਜਾਏ ਤੂੰ ਮਹਾਰਾਜ ਆਏ ਤੇ ਕਿੰਨੀ ਉਹ ਤੇਰੇ ਕੋ ਪਤਾ ਨਹੀਂ ਕਿਹੜੇ ਨਰਕ ਜਮਾਲ ਦੇ ਚੱਕੇ ਅਗਲੇ ਜਨਮ ਤੇ ਚੱਲ ਦੋ ਸਾਲ ਨੂੰ ਜੜੀ ਜਾਈ ਫਿਰ ਪੌੜੀ ਕੀ ਡੰਮ ਬਣ ਕੇ ਕਹਿੰਦੀ ਹੈ ਦਰਬਾਰੀ ਸਾਹਿਬ ਹੁਣ ਕੋਈ ਨਾ ਸੁਣੇ ਗੁਰਬਾਣੀ ਨੇ ਦੱਸਾਇਆ ਸੀ ਆਪਣੀ ਗੱਲ ਹਾਂਜੀ ਫਿਰ ਫਿਰ ਆਵਣ ਜਾਣ ਨਾ ਹੋਈ ਏਕ ਹੈ ਏਕ ਜਪੋ ਜਪ ਸੋਈ ਜੇ ਇੱਕ ਨੂੰ ਜਪ ਲਈਏ ਇੱਕ ਹੈ ਇੱਕ ਜਪੇ ਹੋ ਕੇ ਇੱਕ ਨੂੰ ਸਮਝ ਲੈ ਇੱਕ ਆਪਣੇ ਆਪ ਨੂੰ ਜਾਣਣਾ ਇੱਕ ਜਪਣ ਇੱਕ ਹੈ ਏਕ ਜਪੇ ਜਪ ਜਿਹਨੇ ਜਪ ਲਿਆ ਇੱਕ ਨੂੰ ਜਿਹਨੇ ਆਤਮ ਗਿਆਨ ਲੈ ਲਿਆ ਆਤਮਾ ਦਾ ਗਿਆਨ ਜੀ ਹੋ ਗਿਆ ਸਮਝ ਆ ਗਈ ਉਹ ਦੁਬਾਰਾ ਨਹੀਂ ਜਨਮ ਲੈਂਦਾ ਉਹਦਾ ਫਿਰ ਫਿਰ ਆਉਣਾ ਜਾਣਾ ਨਹੀਂ ਹੁੰਦਾ ਬਸ ਸਿੱਧੀ ਗੱਲ ਆਤਮ ਗਿਆਨ ਹੈ ਗੁਰਬਾਣੀ ਦੇ ਵਿੱਚ ਆਤਮ ਬੋਧ ਹੈ ਗੁਰਬਾਣੀ ਦੇ ਵਿੱਚ ਜਿਹਨੇ ਆਤਮ ਗਿਆਨ ਲੈ ਲਿਆ ਉਹਦਾ ਦੁਬਾਰਾ ਜਨਮ ਨਹੀਂ ਹੁੰਦਾ ਫਿਰ ਫਿਰ ਆਉਣ ਜਾਣ ਨਾ ਹੋਈ ਇੱਕ ਉਹ ਇੱਕ ਜਪਾਇ ਜਪ ਸੋਈ ਜਿਹਨਾਂ ਨੇ ਇੱਕ ਦਾ ਜਾਪ ਜਪ ਲਿਆ ਇੱਕ ਨੂੰ ਜਾਣ ਲਿਆ ਇੱਕ ਨੂੰ ਸਮਝ ਲਿਆ ਔਰ ਇੱਕ ਹੋ ਗਏ ਉਹ ਦੁਬਾਰਾ ਜਨਮ ਨਹੀਂ ਲੈਂਦੇ ਹਾਂਜੀ ਕਰੋ ਕਿਰਪਾ ਪ੍ਰਭ ਕਰਨ ਹਾਰੇ ਮੇਰ ਲਿਓ ਨਾਨਕ ਵਿਚਾਰੀ ਪ੍ਰਭ ਕਰਨ ਹਾਰੇ ਕਿਰਪਾ ਕਰੋ ਬੇਲ ਰਿਓ ਨਾਨਕ ਬੇਚਾਰੇ ਨਾਨਕ ਵਿਚਾਰੇ ਨੂੰ ਆਪਣੇ ਨਾਲ ਬੁਲਾ ਲਓ ਨਾਨਕ ਵਿਚਾਰਾ ਜਿਹਨੂੰ ਗੁਰੂ ਕਹਿੰਦੇ ਹੋ ਨਾਨਕ ਕਹਿੰਦਾ ਮੈਂ ਵਿਚਾਰਾ ਚਾਰਾ ਕੋਈ ਨਹੀਂ ਹੈ ਮੇਰਾ ਤੂੰ ਮੈਨੂੰ ਆਪਣੇ ਨਾਲ ਬੁਲਾ ਲੈ ਗੁਰੂ ਨੂੰ ਗਾਇਰੇ ਨਾਨਕ ਗੁਰੂ ਗੁਰੂ ਦਾ ਰੌਲਾ ਪਾਇਆ ਆਪ ਨਿਗਰੇ ਹੋ ਗਏ ਨਾਨਕ ਨੂੰ ਗੁਰੂ ਬਣਾ ਕੇ ਤੇ ਨਾਨਕ ਵਾਲੇ ਗੁਰੂ ਨੂੰ ਗੁਰੂ ਬਣਾਉਂਦੇ ਫਿਰ ਗੁਰੂ ਵਾਲੇ ਬਣਦੇ ਨਾਨਕ ਨੂੰ ਗੁਰੂ ਬਣਾਉਣ ਵਾਲੇ ਬੰਨਣ ਵਾਲੇ ਨਿਗਰੇ ਨੇ ਸਾਰੇ ਨਿਗਰਾ ਕਹਿੰਦੇ ਨੇ ਗਿਆਨ ਤੋਂ ਸੀਨ ਨੂੰ ਜਿੰਨ ਬਾਣੀ ਦੀ ਸਮਝ ਨਹੀਂ ਆਉਂਦੀ ਗੋਰੇ ਨੇ ਸਾਰੇ ਨਾਨਕ ਕਸੰਦ ਸਾਰੇ ਤੇ ਕਬਜਾ ਨਾਨਕ ਨਾਵਾ ਬਾਜ ਸੁਨਾਤ ਜੀ ਨਾਲ ਨੂੰ ਕੋ ਨਾਮ ਦੀਓ ਸਾਰੇ ਹੀ ਨੀਚ ਦੇ ਬਿਗੋਰਾ ਨੀਚ ਕੋਈ ਗੱਲ ਹੁੰਦੀ ਹੈ ਜਿਹੜਾ ਨਗੋਰਾ ਉਹ ਨੀਚ ਵੀ ਹੈ ਕਿ ਗੁਰੂ ਆਲਾ ਕਦੇ ਨਹੀਂ ਚੋੜੂਗਾ ਗੁਰੂ ਆਲੇ ਨੂੰ ਕਦੇ ਨਹੀਂ ਛੱਡੂਗਾ ਗੁਰਬਾਣੀ ਨੀਚ ਬੰਦ ਹੈ ਜੀ ਤੇ ਨਾਮ ਦੀਓ ਤਾਂ ਗੁਰਬਾਣੀ ਝੂਠੀ ਹੈ ਤੁਸੀਂ ਸੱਚੇ ਹੋ ਕਿ ਗੁਰਬਾਣੀ ਸੱਚੀ ਹੈ ਤੁਸੀਂ ਦਿਖਾ ਦਿਓ ਨਾਨਕ ਦਾ ਗੁਰੂ ਬਣ ਵਾਲਾ ਬਿਗੋਰੇ ਰਹਿਗੇ ਜਾਣ ਤੋਂ ਸਖਣੇ ਰਹਿਗੇ ਜਾਣ ਤੋਂ ਸਖਣਾ ਕੀ ਹਾਲ ਹੋ ਗਿਆ ਜਾਂ ਲੋਕਾਂ ਨੂੰ ਦੋਇਆ ਤੁਹਾਡਾ ਉਦੋਂ ਵੀ ਭੈੜਾ ਹੋਊਗਾ ਉਹ ਜਿਨਾ ਨੂੰ ਸਮਝ ਨਹੀਂ ਜਿਨ੍ਹਾਂ ਨੂੰ ਕਿਸੇ ਨੇ ਦੱਸਿਆ ਨਹੀਂ ਉਹਨਾਂ ਨੂੰ ਤਾਂ ਕੁਝ ਕਹਿਣ ਨੂੰ ਤਾਂ ਸਾਡਾ ਪਤਾ ਨਹੀਂ ਲੱਗਿਆ ਉਹਨੇ ਕੀ ਕਹਦੇ ਚੱਤੋਗੇ ਉਸਨੇ ਕੁਝ ਐ ਠੀਕ ਹੈ ਜੀ ਆਹ 38ਵੀਂ ਪੜਵੀ ਸਮਾਪਤੀ ਹੈ ਜੀ ਤੇ ਫਫੇ ਅੱਖਰ ਤੋਂ ਉਪਦੇਸ਼ ਇਹੀ ਹੈ ਕਿ ਸ਼ਰਦਾ ਛੱਡ ਕੇ ਗਿਆਨ ਤੱਕ ਪਹੁੰਚਣਾ ਤੇ ਉਹਦੇ ਨਾਲ ਗੁਰਨਾਣ ਸਾਹਿਬ ਕਹਿੰਨੇ ਆ ਫਾਹੀ ਕੱਟੇ ਜਾਣਗੇ ਤੇ ਪੰਜਵੇਂ ਪਾਤਸ਼ਾਹ ਕਹਿੰਨੇ ਆ ਜਿਹੜਾ ਆਉਣ ਜਾਣ ਦਾ ਫਫਾ ਫਿਰ ਤੇ ਜਾਣਾ ਬੋਲ ਤਾਂ ਦਲੀ ਰਹਿਣ ਜਿਹੜਾ ਕਿਸੇ ਪੇੜ ਦਾ ਗੰਧ ਕਹਿੰਦੇ ਨੇ ਇਹ ਹੁਣ ਬੋਟਨੀ ਵਾਲੇ ਵੀ ਪੇੜ ਦਾ ਗੰਧ ਨਿਕਲ ਜਾਂਦਾ ਬਾਹਰ ਫਲ ਆਉਂਦਾ ਫਿਰ ਕਾਹੋ ਚ ਰਸ ਮਿੱਠਾ ਬਣਦਾ ਉਹ ਜਿਹੜਾ ਖਰਾਬ ਰਸ ਹੁੰਦਾ ਉਹ ਫੁੱਲ ਦੇ ਵਿੱਚ ਨਿਕਲ ਜਾਂਦਾ ਠੀਕ ਹੈ ਜੀ ਤੇ ਜੇ ਕਹਨ ਇਹ ਸਿਕਲ ਕਰ ਰੱਖਣਾ ਕਿ ਜਹਾਂ ਗਿਆਨ ਤੇ ਧਰਮ ਹੈ ਤੇ ਫਲ ਕਾਰਨ ਆ ਹਾਲੇ ਦੇ ਡਾਂਗ ਨਹੀਂ ਫਿਰਦੇ ਨਾ ਕੇ ਕਹਿੰਦੇ ਉਹਦੇ ਤੇ ਸਿਕਤਾ ਗਿਆਨ ਦੇ ਮਗਰ ਡਾਂਗ ਨਹੀਂ ਫਿਰਦੇ ਸਾਡੇ ਅਗਲ ਕਮੇ ਨੇੜੇ ਆ ਜੀ ਸਾਡੇ ਕੋਲ ਡਾਂਗ ਲੈਟੀ ਲੱਭੀ ਠੀਕ ਹੈ ਜੀ ਇੱਥੇ ਆਪਾਂ ਪੇ ਦੀ ਸੋ